ਨਿਰਗੁਣ ਹੀ ਸਰਗੁਣ ਹੋ ਜਾਂਦਾ ਹੈ ਸਰਗੁਣ ਤੋਂ ਹੀ ਨਿਰਗੁਣ ਹੋ ਜਾਂਦਾ ਹੈ ਨਿਰਗੁਣ ਸਰਗੁਣ ਦੀ ਕਥਾ ਇੱਕ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਇੱਕ ਵਾਰੀ ਸਵਾਲ ਹੋਇਆ ਮਹਾਰਾਜ ਇਹ ਜਿਹੜੀ ਨਿਰਗੁਣ ਤੇ ਸਰਗੁਣ ਦੀ ਕਥਾ ਚੱਲ ਰਹੀ ਹੈ ਇਹਦੇ ਬਾਰੇ ਆਪ ਦਾ ਕੀ ਵਿਚਾਰ ਹੈ ਨਿਰਗੁਣ ਤੇ ਸਰਗੁਣ ਵਿੱਚ ਫਰਕ ਕੀ ਹੈ ਕਈ ਲੋਕ ਕਹਿੰਦੇ ਨੇ ਅਸੀਂ ਨਿਰਗੁਣ ਨੂੰ ਮੰਨਦੇ ਆ ਕੋਈ ਸਰਗੁਣ ਤੱਕ ਪਹੁੰਚ ਐ ਕੋਈ ਕਹਿੰਦਾ ਨਿਰਗੁਣ ਤੱਕ ਪਹੁੰਚ ਐ ਇਹ ਆਪੋ ਵਿੱਚ ਟਕਰਾਓ ਕਿਉਂ ਐ ਗੁਰੂ ਅਰਜਨ ਦੇਵ ਜੀ ਨੇ ਬਹੁਤ ਸੁੰਦਰ ਜਵਾਬ ਦਿੱਤਾ ਉਹ ਕਹਿੰਦੇ ਨੇ ਗੁਰਮਖੋ ਨਿਰਗੁਣ ਸਰਗੁਣ ਆਪ ਪ੍ਰਭ ਸੁੰਨ ਸਮਾਦੀ ਆਪ ਆਪਣ ਨਾਨਕਾ ਆਪੇ ਹੀ ਫਿਰ ਜਾਪ ਉਹਨਾਂ ਨੇ ਇਹ ਦੱਸਿਆ ਕਿ ਨਿਰਗੁਣ ਤੇ ਸਰਗੁਣ ਪਾਰ ਬ੍ਰਹਮ ਤੇ ਪੂਰਨ ਬ੍ਰਹਮ ਇਹ ਦੋਵੇਂ ਇੱਕ ਸ਼ਕਤੀ ਨੇ ਇਹਨਾਂ ਦੇ ਨਾਮ ਦੋਨੇ ਇਹਦੇ ਰੂਪ ਦੋਨੇ ਇੱਕ ਥਾਂ ਹੋਰ ਸ਼ਬਦ ਆਇਆ ਕਹਿੰਦੇ ਨੇ ਪਾਰ ਬ੍ਰਹਮ ਪੂਰਨ ਬ੍ਰਹਮ ਸਤ ਗੁਰ ਆਪੇ ਆਪ ਉਪਾਇਆ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਇੱਕ ਜੋਤ ਦੋਏ ਨਾਮ ਤਰਾਇਆ ਜੋਤ ਇੱਕ ਹੈ ਨਾਮ ਦੋ ਦੇ ਇਹਦੇ ਗੁਰਬਾਣੀ ਦਾ ਇਹ ਵਿਚਾਰ ਹੈ ਪਰ ਮਨੁੱਖ ਦੀ ਦ੍ਰਿਸ਼ਟੀ ਇੱਕ ਨਹੀਂ ਵੜੀ ਮਨੁੱਖ ਨੂੰ ਇੱਕ ਨਹੀਂ ਸਮਝ ਸਕਿਆ ਇਸ ਵਾਸਤੇ ਗੁਰੂ ਤੀਸਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਅਮਰਦਾਸ ਜੀ ਸ੍ਰੀ ਰਾਗ ਵਿੱਚ ਕਹਿੰਦੇ ਨੇ ਜੇ ਹਾ ਸਤਗੁਰ ਕਰ ਜਾਣਿਆ ਤੇ ਹੋ ਜੇ ਹਾ ਹੋਏ ਜੈਸਾ ਕਿਸੇ ਨੇ ਜਾਣ ਲਿਆ ਉਹਨਾਂ ਕੀ ਸੁਖ ਉਹਨੂੰ ਪ੍ਰਾਪਤ ਹੋਇਆ ਗੁਰੂ ਨੂੰ ਐਸਾ ਹੋਇਆ ਕਿ ਇੱਕ ਵਾਰੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣਾ रूप ਬਦਲਿਆ ਤੇ ਜੋਤ ਅੰਗ ਵਿੱਚ ਅੰਗਦ ਵਿੱਚ ਧਰ ਦਿੱਤੀ ਤੇ ਹੁਕਮ ਕਰ ਦਿੱਤਾ ਕਿ ਤੁਸੀਂ ਖਡੂਰ ਸਾਹਿਬ ਚਲੇ ਜਾਓ ਇੱਥੇ ਤੁਹਾਨੂੰ ਸ੍ਰੀ ਚੰਦ ਗਿਆਨੇ ਰਹਿਣ ਨਹੀਂ ਦੇਣਾ ਹੁਕਮ ਹੋ ਗਿਆ ਖਡੂਰ ਸਾਹਿਬ ਆ ਗਏ ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ ਜੋਤੀ ਗੁਰੂ ਅੰਗਦ ਦੇਵ ਜੀ ਵਿੱਚ ਜੋਤ ਆ ਗਈ ਤੇ ਖਡੂਰ ਸਾਹਿਬ ਆ ਗਏ ਤੇ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਨੂੰ ਇੱਥੇ ਸੱਦ ਲਿਆ ਆਪਣੇ ਕੋਲ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆ ਗਏ ਇੱਥੇ ਆ ਗਏ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਭਾਈ ਬਾਲੇ ਨੂੰ ਆਖਿਆ ਕਿ ਤੂੰ ਇਸ ਤਰ੍ਹਾਂ ਕਰਿਆ ਕਰੋ ਗੁਰੂ ਨਾਨਕ ਦੇਵ ਜੀ ਦੀ ਕਥਾ ਤੇ ਜਿੰਨੀਆਂ ਵੀ ਜਿੰਨਾ ਚਿਰ ਤੁਸੀਂ ਨਾਲ ਰਹੇ ਹੋ ਤੇ ਜੋ ਕੁਝ ਤੁਸੀਂ ਦੇਖਿਆ ਉਹ ਜਰਾ ਲਿਖਤੀ ਰੂਪ ਵਿੱਚ ਸਾਨੂੰ ਲਿਖਾ ਦਿਓ ਜਿੱਥੋਂ ਜਨਮ ਸਾਖੀ ਦਾ ਜਨਮ ਹੋਇਆ ਭਾਈ ਬਾਲਾ ਗੁਰੂ ਨਾਨਕ ਦੇਵ ਜੀ ਦਾ ਜੀਵਨ ਤੇ ਉਹਨਾਂ ਦੇ ਚਰਿੱਤਰ ਲਿਖਾਉਣੇ ਸ਼ੁਰੂ ਕੀਤੇ ਤੇ ਪਤਾ ਨਹੀਂ ਕਿੰਨਾ ਚਿਰ ਲਿਖਦੇ ਰਹੇ ਇੱਕ ਦਿਨ ਭਾਈ ਬਾਲੇ ਦੇ ਮਨ ਵਿੱਚ ਇੱਕ ਗੱਲ ਆਈ ਵਿਚਾਰ ਕੀਤਾ ਮਨਾਂ ਸਾਰੀ ਉਮਰ ਗੁਰੂ ਨਾਨਕ ਦੇਵ ਜੀ ਦੇ ਨਾਲ ਕੱਟੀ ਐ ਧਿਆਨ ਰੱਖਣਾ ਬਚਪਨ ਤੋਂ ਹੀ ਬਾਲਾ ਨਾਲ ਸੀ ਕਿਉਂਕਿ ਬਾਲਾ ਉਮਰ ਕਰਕੇ 3 ਸਾਲ ਵੱਡਾ ਗੁਰੂ ਨਾਨਕ ਦੇਵ ਜੀ ਤੋਂ ਬਾਲੇ ਦਾ ਜਨਮ 1523 ਦਾ ਤੇ ਗੁਰੂ ਨਾਨਕ 26 ਵਿੱਚ ਆਉਂਦੇ ਨੇ ਇਸੇ ਵਾਸਤੇ ਕੁਝ ਉਮਰ ਤੋਂ ਵੱਡਾ ਹੋਣ ਕਰਕੇ ਮਹਿਤਾ ਕਾਲੂ ਨੇ ਨਾਲ ਭੇਜਿਆ ਸੀ ਭਈ ਤੂੰ ਜਾ ਨਾਲ ਸੌਦਾ ਖਰੀਦਣ ਵਾਸਤੇ ਉੱਥੋਂ ਹੀ ਸਾਥ ਬਣ ਗਿਆ ਜੋ ਕੁਛ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਬੀਤਿਆ ਉਹ ਸਭ ਕੁਝ ਬਾਲੇ ਦੇ ਅੰਦਰ ਹੈ ਹੁਣ ਬਾਲੇ ਦੇ ਅੰਦਰ ਇੱਕ ਦਿਨ ਇਹ ਥੋੜਾ ਜਿਹਾ ਸ਼ੰਕਾ ਪ੍ਰਗਟ ਹੋਇਆ ਸੋਚਿਆ ਮਨਾ ساری ਉਮਰ ਗੁਰੂ ਦੇ ਨਾਲ ਰਹੇ ਪਰ ਗੁਰੂ ਨਹੀਂ ਬਣ ਸਕਕੇ ਗੁਰੂ ਲੈਣੇ ਨੂੰ ਬਣਾ ਦਿੱਤਾ ਗੁਰੂ ਅੰਗਦ ਦੇਵ ਜੀ ਬਣ ਗਏ ਗੁਰਿਆਈ ਇਹਨਾਂ ਕੋਲ ਆ ਗਈ ਆਪਾਂ ਉਸੇ ਤਰ੍ਹਾਂ ਹੀ ਰਹਿ ਗਏ ਮਾਣੇ ਵਿੱਚ ਗੱਲ ਆਈ ਤੇ ਸਤਿਗੁਰੂ ਤ੍ਰਿਕਾਲ ਦਰਸ਼ੀ ਹੁੰਦੇ ਨੇ ਸਤਿਗੁਰੂ ਅੰਤਰਜਾਮੀ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਛਿਆ ਉਸੇ ਵੇਲੇ ਭਾਈ ਬਾਲਾ ਤੂੰ ਮੈਨੂੰ ਇਹ ਗੱਲ ਦੱਸ ਕਿ ਤੂੰ ਗੁਰੂ ਨਾਨਕ ਦੇਵ ਜੀ ਨੂੰ ਕਿੱ사 ਜਾਣਿਆ ਤੂੰ ਕੀ ਨਿਸ਼ਾਨਾ ਤੇਰੇ ਅੰਦਰ ਤੇਰੀ ਦ੍ਰਿਸ਼ਟੀ ਨੇ ਕੀ ਕੰਮ ਕੀਤਾ ਗੁਰੂ ਨਾਨਕ ਜੀ ਨੂੰ ਕੀ ਸਮਝਿਆ ਭਾਈ ਬਾਲੇ ਨੇ ਜਵਾਬ ਦਿੱਤਾ ਮਹਾਰਾਜ ਮੈਂ ਗੁਰੂ ਨਾਨਕ ਦੇਵ ਜੀ ਨੂੰ ਪੂਰਨ ਸੰਤ ਮੰਨਿਆ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ ਭਾਈ ਬਾਲਾ ਤੂੰ ਆਪਣਾ ਆਪਣੇ ਸਵਾਲ ਦਾ ਜਵਾਬ ਆਪ ਹੀ ਲੈ ਲਿਆ ਆਪਣੇ ਸਵਾਲ ਦਾ ਜਵਾਬ ਆਪ ਦੇ ਦਿੱਤਾ ਤੂੰ ਕਿਉਂ ਜੀ ਕਹਿੰਦੇ ਨੇ ਤੂੰ ਗੁਰੂ ਨਾਨਕ ਦੇਵ ਜੀ ਨੂੰ ਸੰਤ ਸਮਝਿਆ ਤੇ ਤੈਨੂੰ ਪੂਰਨ ਸੰਤ ਬਣਾ ਦਿੱਤਾ ਮੈਂ ਗੁਰੂ ਨਾਨਕ ਦੇਵ ਜੀ ਨੂੰ ਪਾਰ ਬ੍ਰਹਮ ਸਮਝਿਆ ਗੁਰੂ ਸਮਝਿਆ ਤੇ ਮੈਨੂੰ ਗੁਰੂ ਬਣਾ ਦਿੱਤਾ ਤੂੰ ਤੇ ਆਪ ਹੀ ਆਪਣਾ ਫੈਸਲਾ ਕਰ ਲਿਆ ਜੇ ਹਾ ਸਤਗੁਰ ਕਰ ਜਾਣਿਆ ਧਿਆਨ ਰੱਖਣਾ ਮੈਂ ਇਹਦੇ ਤੇ ਪ੍ਰਮਾਣ ਦੇ ਨੇ ਜੇ ਹਾ ਕਰ ਜਾਣਿਆ ਤੇ ਹੋ ਜੇ ਹਾ ਹੋਏ ਪਰ ਮੈਂ ਇਹ ਕਈ ਵਾਰੀ ਅਰਜ ਕੀਤੀ ਹੈ ਕਿ ਐਸੀ ਦ੍ਰਿਸ਼ਟੀ ਮਿਲਦੀ ਵੀ ਗੁਰੂ ਕੋਲੋਂ ਹੀ ਜੇ ਆਪਣੇ ਆਪ ਕਦੀ ਐਸੀ ਦ੍ਰਿਸ਼ਟੀ ਕਿ ਜੁਸੀਂ ਕਿਸੇ ਦੀ ਬਣੀ ਨਹੀਂ ਕਿਉਂਕਿ ਸਤਗੁਰਾਂ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਕੀ ਦ੍ਰਿਸ਼ਟੀ ਹੁੰਦੀ ਹੈ ਦੇਵ ਦ੍ਰਿਸ਼ਟੀ ਦੇਵ ਦ੍ਰਿਸ਼ਟੀ ਗੁਰੂ ਅਰਦਾਸ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਕਹ ਨਾਨਕ ਇਹ ਦੇਤਰ ਅੰਗ ਸੇ ਸਤਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਕਹਿੰਦੇ ਨੇ ਮੇਰੇ ਵੀ ਪਹਿਲਾਂ ਮੈਂ ਵੀ ਅਗੇ ਅੰਧਾ ਬਹੁਤਾ ਗੁਰਬਾਣੀ ਵਿੱਚ ਜਿੱਥੇ ਅੰਧਾ ਸ਼ਬਦ ਆਇਆ ਨਾ ਉਹ ਅਗਿਆਨੀ ਨੂੰ ਆਖਿਆ ਅੰਧੇ ਅਕਲੀ ਬਾਹਰੇ ਕਿਆ ਤੈਨਸਿਓ ਕਈਐ ਇਤਿਹਾਦਕ ਜਿੱਥੇ ਵੀ ਅੰਧੇ ਜਾਂ ਅੰਧਾ ਸ਼ਬਦ ਆਇਆ ਉਹ ਬਹੁਤਾ ਅਗਿਆਨੀ ਵਾਸਤੇ ਵਰਤਿਆ ਗਿਆ ਗੁਰੂ ਪਾਤਸ਼ਾਹ ਕਹਿੰਦੇ ਨੇ ਜਿੰਨਾ ਚਿਰ ਮੈਂ ਵੀ ਭੋਂਦਾ ਰਿਆਂ ਤੀਰਥਾਂ ਤੇ ਉਹਨਾਂ ਚਿਰ ਗੱਲ ਹੋਰ ਸੀ ਉਦੋਂ ਮੈਂ ਅਗਿਆਨਤਾ ਵਿੱਚ ਰਿਆ ਇਹ ਨੇਤਰ ਅੰਨੇ ਸਣ ਮੇਰੇ ਗੁਰੂ ਨਹੀਂ ਦਿਸਿਆ ਤੇ ਹੁਣ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਿਲ ਪਏ ਨੇ ਤੇ ਹੁਣ ਮੇਰੀ ਦ੍ਰਿਸ਼ਟੀ ਬਦਲ ਗਈ ਹੈ ਇਹ ਦ੍ਰਿਸ਼ਟੀ ਦੇਵ ਦ੍ਰਿਸ਼ਟੀ ਹੋ ਗਈ ਦੇਵਤਿਆਂ ਵਾਲੀ ਦ੍ਰਿਸ਼ਟੀ ਹੋ ਗਈ ਦਿਵ ਦ੍ਰਿਸ਼ਟੀ ਹੋ ਗਈ ਸੋ ਇਹ ਮਿਲੀ ਕਿੱਥੋਂ ਹੈ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੋਂ ਮਿਲੇਗੀ ਹੁਣ ਇਹਦੇ ਤੇ ਐਸੀ ਦ੍ਰਿਸ਼ਟੀ ਵਾਲਿਆਂ ਦੀ ਮੈਂ ਅਰਜ਼ ਕਰਨੀ ਹੈ ਇੱਕ ਨਾਮ ਇਤਿਹਾਸ ਵਿੱਚ ਮੈਦਾਨੀ ਹੋਈ ਹੈ ਪਿੰਡ ਚੰਬਾ ब्यास ਦੇ ਕਿਨਾਰੇ ਤੇ ਇੱਥੋਂ ਦੀ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਇਸ ਨੇ ਤੇ ਗੁਰੂ ਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਇਸ ਤਰ੍ਹਾਂ ਹੋ ਗਿਆ ਭਜਨ ਪੁਛ ਲਿਆ ਤੇ ਇਹ ਹੈ ਭਜਨ ਨਾਮ ਜਪਦਿਆਂ ਜਪਦਿਆਂ ਮਨ ਜਿਹੜਾ ਸੀ ਨਾ ਇਹਦਾ ਸਮ ਦ੍ਰਿਸ਼ਟੀ ਹੋ ਗਈ ਇੱਕੋ ਜਿਹਾ ਵੇਖਣ ਇਸ ਮਾਈ ਦਾ ਪਤੀ ਜਵਾਨ ਉਮਰ ਵਿੱਚ ਕਾਲ ਬਸ ਹੋ ਗਿਆ ਦੋਏ ਮਾਂ ਪੁੱਤਰ ਰਹਿ ਗਏ ਛੋਟਾ ਜਿਹਾ ਪੁੱਤਰ ਸੀ ਆਪਣਾ ਗੁਜ਼ਾਰਾ ਪੈ ਕਰਦੇ ਰਹੇ ਛੋਟਾ ਜਿਹਾ ਪਰਿਵਾਰ ਪਰ ਇਹ ਹੁਣ ਕੱਲਾ ਪੁੱਤਰ ਮਾਂ ਦਾ ਬਾਕੀ ਸਾਰਿਆਂ ਸ਼ਰੀਕਾਂ ਦਾ ਅੱਧੀ ਜ਼ਮੀਨ ਅੱਧੀ ਇਹਦੇ ਕੋਲ ਤੇ ਅੱਧੀ ਕਈਆਂ ਕੋਲ ਉਹ ਬਰਦਾਸ਼ਤ ਨਾ ਕਰ ਸਕੇ ਬਰਦਾਸ਼ਤ ਨਹੀਂ ਕੀਤਾ ਤੇ ਕੀਤਾ ਕੀ ਕੇ ਉਹਨਾਂ ਨੇ ਕਰਦਿਆਂ ਕਰਦਿਆਂ ਇਸ ਬੱਚੇ ਨੂੰ ਮਾਤਾ ਦੇ ਲੜਕੇ ਨੂੰ ਕਤਲ ਕਰ ਦਿੱਤਾ ਜ਼ਮੀਨ ਦੇ ਲਾਲਚ ਕਰਕੇ ਕਤਲ ਕਰ ਦਿੱਤਾ ਮਾਤਾ ਨੂੰ ਪਤਾ ਲੱਗਾ ਉਹਦੇ ਅੱਖਾਂ ਚੋਂ ਜਰਾ ਅंसू ਨਹੀਂ ਆਇਆ